ਸੋ ਪਈ ਅਛਲ ਹਸੈਨ ਇਕ ਭੂਪ ਨਿਜੈ ਚੰਦਰ ਸੂਰ ਪਟ ਤਰ ਤਿਹ ਦਿਜੈ ਕੰਚਨ ਦੇ ਤਾਕੇ ਨਾਰੀ ਆਪ ਹਾਥ ਲੈ ਈਸ ਸਵਾਰੀ ਕੰਚਨਪੁਰ ਕੋ ਰਾਜ ਕਮਾਵੇ ਸੂਰ ਵੀਰ ਬਲਵਾਨ ਕਹਾਵੇ ਆਰੀ ਅਨੇਕ ਜੀਤੇ ਬਹੁ ਭਾਂਤਾ ਤੀ ਤਰਸ ਜਾਕੇ ਪੁਰਸਾਤਾ ਤਹਾ ਪ੍ਰਭਾ ਕਰ ਸਾਹ ਨਿਰਖ ਲਜ ਜਾ ਕੋ ਜਬ ਰਾਣੀ ਤਾ ਕਹ ਲਖ ਪਾਇਓ ਇਹ ਚਿਤ ਭੀਤਰ ਠਹਰਾਇਓ ਯਾ ਕਾ ਯਤਨ ਕਮਨ ਕਰ ਪਈਐ ਕਮਨ ਸਾਧਰੀ ਪਠੈ ਮੰਗਈਐ ਯਾਹੇ ਭਜੈ ਬਿਨ ਧਾਮ ਨ ਜਾਇ ਹਉ ਤੇ ਭਾਂਤ ਯਾਹੇ ਵਸ ਕੈ ਕਨਕ ਪਿੰਜਰੀ ਪਰੀ ਹੁਤੀ ਤਹਾ ਮਰਮ ਕੇ ਵਸੀ ਰਾਹ ਤੇ ਤਹੀ ਪਠਾਈ ਸੇ ਜੋ ਆਈ ਕਾਂ ਭੂਕਤਾ ਸੋ ਜਬ ਮਨ ਆਦਵੈ ਪ੍ਰਾਨਨ ਤੇ ਇਕ ਜੀ ਜਾਣਾ ਨਿਧ ਨਾਇਕ ਸੇਤੀ ਹਿਤ ਛੋ ਰੋਤਾ ਸਹਿ ਚਤੁਰ ਨੂੰ ਜੋਰੋ ਜਾਇ ਰਾਪ ਸੋ ਬਾਤ ਜਨਾਈ ਮੋਰੋ ਸ਼ਾਹ ਪੂਰਬ ਭਾਈ ਸ਼ਰਾਪ ਏਕ ਰਖ ਦੀਆ ਤਾਤੇ ਜਨਮ ਦੁਹੂ ਹਿਆ ਲੀਆ ਪੁਣ ਹਮ ਸੋ ਰਖਿਆ ਸੋ ਚਾਰ ਆਵੈ ਹੈ ਬਹਰੋ ਉਧਾਰ ਤੁਹਾਰਾ ਮਾਤ ਲੋਗ ਬਹੁ ਬਰਸ ਬਿਤੇ ਹੋ ਬਹਰੋ ਦਉ ਸਵਰਗ ਮੈਂ ਐ ਹੋ ਹਮ ਤੁਮਰੋ ਘਰ ਬਸ ਸੁਖ ਪਾਇਓ ਆਵ ਰਖ ਸ਼ਰਾਪ ਆਵ ਦੇਵੈ ਆਇਓ ਏ ਬਜ ਪਾਖ ਨਿਰਪੈ ਕਰ ਆਈ ਛਾਪਰੀ ਜੁਤ ਲਿਆ ਬੁਲਾਈ ਚੋ ਬਈ ਗਈ ਇਹ ਗਈ ਧਨ ਤੁਮ ਕਰਿਓ ਪੂਬ ਸੁੰਦ ਜਬ ਤਿਨ ਬਾਦ ਭੇਦ ਜਾਨੀ ਭਲਾ ਕਹੋਗੀ ਪਰੀ ਬਖਾਨੀ ਸ਼ਾਹ ਸਹਿਤ ਊਪਤ ਪਹ ਜਾਏ ਕਹੀ ਜਾਤ ਹੈ ਰਾਏ ਇਹ ਵਿਦ ਭਾਖ ਲੋਭ ਗਈ ਗਈ ਗਈ ਬਾਣੀ ਨਭ ਭਈ ਅੜਿਲ ਗਈ ਜਾ ਗਈ ਚਿਰਲੋ ਨਭ ਬਾਣੀ ਭਈ प्रयास है तिन भूप यह जी में ठई रानी सुरपुर गई प्रातः को साथ लै हो मूर्ख भेद अपेद ना सका विचार कय चौपई मिल सबइन ए बात उचारी गई स्वर्ग निरप नार तुम्हारी तुम चिंता चित में नहि करो सुंदर सुघर अवर्तियै बरो ਇਤਿ ਸ੍ਰੀ ਚਿਤ੍ਰਪਖਿਆਨੇ ਤ੍ਰਿਆਚਿਤਰੇ ਭੂਪ ਮੰਤਰੀ ਸੰਵਾਦੇ 371 ਚਿਤ੍ਰ ਸਮਾਪਤ ਮਸ ਸੁਭ ਮਸਤੇ ਅਪਜੂ ਚਉਪਈ ਸੁਨ ਰਾਜਾ ਇਕ ਅਵਰ ਪ੍ਰਸੰਗਾ ਜੇ ਵਿਦਕਿਆ ਨਾਰ ਨਿਰਪ੍ਰਸੰਗਾ ਜਲਜ ਸੈਨ ਇਕ ਭੂਪ ਵਨੇਜੈ ਸੋ ਛਾਪ ਬਤੀ ਤੇ ਨਾਰ ਕਹਿ ਜਾ ਸੋ ਛਾਪ ਨਗਰ ਕਹੀ ਜਦ ਅਮਾਰਪੁਰੀ ਪਟਤਰ ਤੇਹ ਦੀ ਇਜਤ ਪਿਆਰੀ ਜਾ ਤੇ ਰਾਣੀ ਰਾਹਤ ਦੁਖਾਰੀ ਰਾਣੀ ਰੂਪ ਵੈਦ ਕੋਠਾ ਨੇ ਰਾਜਾ ਕੀ ਘਰ ਕੀ ਆਪਿਆਨ ਕਾ ਅਸਾਧ ਭਇਆ ਹੈ ਤੋਹੇ ਬੋਲ ਚਕਿਤ ਸਾ ਕੀਜੈ ਮੋਹੇ पावक तुमै पसीनो आवत राव देखत द्रिग तुंद जनावत राजा बात सत्य करमानी मूर्ख भेद की क्रिया ना जानी मूर्ख भूप भेद न पायो तियते बूर उपाय करायो तिन बिघडार औखदी बीचा सिर में करी भूप की मीचा इत शरीर ਜੋ ਬਈ ਸ਼ਹਿਰ ਦੌਲਤਾਬਾਦ ਬਸਤ ਜਹਾ ਵਿਕਟ ਸਿੰਘ ਇੱਕ ਭੂ ਭੂ ਤੋ ਤਹਾ ਭਾਨ ਮੰਜਰੀ ਤਾ ਕੀ ਧਾਰਾ ਜੇ ਸਮ ਕਰੀ ਨਾ ਪੁਨ ਕਰਤਾਰਾ ਭੀਮ ਸੈਨ ਇੱਕ ਤਾ ਥੋ ਸ਼ਾਹਾ ਪ੍ਰਗਟ ਭਇਓ ਜਨ ਦੂ ਸ਼ਰਮਾਹਾ ਸ੍ਰੀ ਅਪਤਾਬ ਦੇ ਤਿਹ ਨਾਰੀ ਕਨ ਕੇ ਅਵਡ ਸਾਚੇ ਜਨ ਢਾਰੀ ਤਿਨ ਮਨ ਮੈਂ ਇਹ ਬਾਤ ਬਖਾਨੀ ਕੇ ਵਿਦ ਕਹਿ ਹੂ ਜੀ ਆ ਭਵਾਨੀ ਸੋਏ ਰਹੀ ਸਭ ਜਗਹ ਦਿਖਾਏ ਚਮਕ ਉਠੀ ਸੁਪਨੇ ਕਹਾ ਪਾਏ ਕਹਾ ਦਰਸਉ ਜੀ ਆਪwani ਸਭ ਸੋ ਪਾਖੀ ਇਮ ਬਾਣੀ ਜੇ ਪ੍ਰਦਾਨ ਦਿਓ ਤਹਿ ਹੋਈ ਜਾ ਮੈ ਪਰੇ ਫੇਰ ਨਹ ਕੋਈ ਲੋਕ ਬਚਨ ਸੁਨ ਕਰ ਪਗ ਲਾਗੇ ਬਰ ਮੰਗਨ ਤਾਤੇ ਅਨੁਰਾਗੇ ਹੋਐ ਬੈਠੀ ਸਭ ਕੀ ਮਾਈ ਆ ਸੁਨ ਖਬਰ ਨਰਾਦਿ ਏਕ ਨਾਰ ਇਹ ਨਗਰ ਪਨੇਜੈ ਨਾਮ ਹਿੰਗੁਲਾ ਦੇ ਕਹੀਜੈ ਜਗਤ ਕੋ ਆਪ ਕਹਾਵੈ ਉਜਨੀਜ ਕਹ ਪਾਏ ਲਗਾਵੇ ਕਾਜੀ ਔਰ ਮੋਲਾਨੇ ਦੇ ਤੇਂ ਜੋਗੀ ਮੁੰਡਿਆ ਅਰ ਦੇਜ ਕੇਤੇ ਸਭ ਕੀ ਕੰਟ ਪੂਜਾ ਹੋਵੈ ਗਈ ਪਰ ਚਾਤਕ ਕੀ ਪਈ ਸਬ ਦੇਖੀ ਜਾਤੇ ਰਿਸ ਪਰੇ ਬਹੁ ਤਨ ਚੜਤ ਨਿਰਖ ਜਰੇ ਗਹਿ ਲੈ ਗਏ ਤਾਹੇ ਨਿਰਪਵਾਸਾਂ ਕਾਹਤ ਭੈ ਇਹ ਬੇਦੀ ਉਭਾਸਾਂ ਕਰਾ ਮਾਦ ਕਛ ਦਿਖਾਏ ਕੈ ਨਾ ਭਵਾਨੀ ਨਾਮ ਕਹਾਏ ਤਬ ਅਵਲਾ ਅਸ ਵਿਚਾਰਾ ਸੁਨ ਰਾਜਾ ਕਹਿੋ ਬਚਨ ਹਮਾਰਾ ਢਿਲ ਮੁਸਲਮਾਨ ਵਸਦਾ ਹੈ ਅੱਲਾਹ ਕਰ ਭਾਖੀ ਬਿਪਰ ਲੋਕ ਪਾਹਨ ਕੋ ਹਰ ਕਰ ਰਾਖੇ ਕਰਾਮਾਤ ਜੋ ਤੋਹੇ ਇਹ ਪ੍ਰਥਮ ਬਤਾਏ ਹੈ ਓ ਤੇ ਪਾਛੇ ਕਛ ਹਉ ਇਨ੍ਹਾ ਦਿਖਾਏ ਹੈ ਚੋਬੀ ਬਚਨ ਸੁਣਤ ਰਾਜਾ ਮੁਸਕਾਏ ਦਿਜ ਬਰ ਪਕਰ ਮੰਗਾਏ ਮੁੰਡਿਆ ਔਰ ਸਰਿਆ ਸੀ ਗਨੇ ਜੋਗੀ ਜੰਗਮ ਜਾਤ ਨਾ ਗਨੇ ਅੜਿਲ ਭੂਪ ਬਚਨ ਮੁਖਤੇ ਇਹ ਭਾਤ ਉਚਾਰਿਓ ਸਭਾ ਬਿਖੈ ਸਭ ਹਿਨ ਤਿਨ ਸੁਣਤ ਵਿਚਾਰਿਓ करामात आप अप अपनी हमै दिखाई है हो ना तरिया भी धाम मृत के जाईए सुन राजा के वचन सभा व्याकुल भए शोक समुंद के बीच बूढ़ सब ही गए निरख निरवत की और रहे सिर न्याय का हो करामात कोई सकै ना ताए दिखाए का करामात मैं लखी क्रोध राजा भरयो साथ साथ स चाबुक तिन के तन चढ़यो करामात अप ਨਾ ਤਰ ਤ੍ਰਿਕੇ ਪਾਇਨ ਸੀਸ ਝੁਕਾਈਐ ਗ੍ਰਹ ਖੁਦਾਇ ਕੈ ਤੀ ਕਛ ਹਮੈ ਦਿਖਾਈਐ ਨਾ ਤਰ ਇਨ ਸੇਖਨ ਕੋ ਕਰਾਮਾਤ ਬਿਨ ਲਖੇ ਨਾ ਮਿਸਰਣ ਛੋਰ ਹੂੰ ਨਾ ਤਰ ਤੁਮਰੇ ਠਾਕੁਰ ਨਾ ਕਰਾਮਾਤ ਕਛ ਹਮੈ ਸੰਿਆਸੀ ਦੀਜੀਐ ਨਾ ਤਰ ਆਪਣੀ ਦੂਰ ਜਟਨ ਕੋ ਕੀਜੀਐ ਚਮਤਕਾਰ ਮੁੰਡਿਓ ਅਬ ਹਮੈ ਦਿਖਾਈਐ उनातर अपनी कंठी नदी बहाइय इन्होरा रोदन वै करते पहे किसु आई बात तब राजै ते नारि को वचन कहा मुस्काते चौपाई करामात मात कछना दिखाई अब चाहत हें तुम ते पाई बचन हिंगला दे उचारें सुनु नारद पि हमारे अडिल करामात एक आसमो प्रथम पहचानिय जाको तेज अर त्रास जगत मो मानिय जीत हार अर मृत तार जाकी बस्त हो मेरे मन परमेश्वर ताही को कहत द्वितीय काल मो करामात पहचानियत जिन हो 14 लोग चक्कर करवानियत काल पाए जग होत काल मिट जावे हो याते मुरमन ताहे गुरु ठहरावी करामाद राजा रसना ग्रज जानियत भलो ब्रो जात जग होत पहचानियत करामाद चौथी तन भीतर जानिया हो भूत रंगते राव धरौ ते मानिया चौबी करामाद इन वह न जानो ए सब थनु पाए पहचानो चमत्कार इन वह हो होई दर दर भीख ना मांगे कोई जो इन सब प्रथम संघारो ते पाछे कश मोहे उचारो ਸਤਿ ਬਾਦ ਹਮ ਕਮੈ ਸੁਨਾਈ ਅਬ ਸੋ ਕਰੋ ਜੋ ਤੁਮਹਿ ਸੁਵਾਈ ਬਚਨ ਸੁਨਤ ਰਾਜ ਆਹਰ ਖਾਨਾ ਅਧਿਕ ਦਿਓ ਤਿਹ ਤਰੀ ਕੋ ਦਾਨਾ ਜਗਤ ਮਾਤ ਤਿਨ ਤਰੀ ਜੋ ਕਹਾਇਓ ਤਿਹ ਪ੍ਰਸਾਦ ਨਿਜ ਪ੍ਰਾਨ ਬਚਾਇਓ ਇਕ ਸ੍ਰੀ ਚਿਤ੍ਰਵਿਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 373 74 ਸੁਆਪਤ ਮਸਤ ਸੁਭ ਮਸਤੇ ਆਪ ਜੂ ਚਉਪਈ ਬੀਜਾ ਪੁਰਜਾ ਸ਼ਾਹ ਪੁਨਿਜੈ ਏ ਦਿਲ ਸ਼ਾਹ ਤਾਹ ਸ਼ਾਹ ਕਹੀਜੈ ਸ੍ਰੀ ਮਹਾਤਾਪ ਮਤੀ ਤੇ ਕੰਨਿਆ ਜੇ ਸਮੂਪਜੀ ਨਾਰ ਨਯੰਨਿਆ ਜੋਵਨਵੰਤ ਭਈ ਜਬ ਬਾਲਾ ਮਹਾਸੁੰਦਰੀ ਨਯਨ ਵਿਸਾਲਾ ਜੋਵਨ ਜੀਵ ਅਦਿਕ ਤੇ ਬਾਢੀ ਜਾਨਕ ਚੰਦਰਸੂਰ ਕਾਢੀ ਤਾਹ ਇਕੂ ਸ਼ਾਹ ਕੋ ਪੂਤ ਸੂਰਤ ਸੀਰਤ ਬਿਖੈ ਸਪੂਤ ਤੂਮਰਕੇਤ ਤੇ ਨਾਮ ਪੁਨਿਜੈ इंद्रचन्द्र पट तरतेहि दिजै बेगम कीता की ता सो जाते नींद भूख सब भागी देख गई जब ते ते धाम मातवते और सुहात न बामा हितु जान साथी बुलाई भेद पाख सब तहां पठाई हमैं साहसत जोतै मिलाए हैं जो तन मुख मांग हैं सो पै हैं सखी पवन के पीस सिधाई पलक ना बिती शाह के आई शाह पूत का किया प्रनामा बैठी जाए सुघरते धामा तुमरो नाम कहा पैचनीयत कवन देश के बासी जनयत सकल वृथा निज प्रथम सुनाबौ बौर क्वार की से स्वभाव सुन सखी मद्र देश हम राही तुमर केत हम कहौ जन कहहि ਸੌਦਾ ਹਿਤ ਆਏ ਇਸ ਦੇ ਸਾ ਦੇਸ ਦੇਸ ਕੋ ਨਿਰਖਨ ਰੇ ਸਾ ਬਤੀਆਂ ਪ੍ਰਥਮ ਤਾਏ ਬਿਰਵਾਏ ਬਾਦ-ਬਾਦ ਤਨ ਲੋਭ ਦਿਖਾਏ ਜਿਉ ਤਿਉ ਲੈ ਆਈ ਜਹਾਂ ਜੋ ਤਨ ਕਹਾ ਸੁੰਦਰ ਤੇਹ ਦੀਨਾ ਕੰਠ ਲਗਾਏ ਮਿੱਤਰ ਸੋ ਲੀਨਾ ਬਾਦ-ਬਾਦ ਕੀ ਕੈਫ ਮੰਗਾਈ ਏਕ ਚੜ ਦਹੂ ਚੜਾਈ ਆਤ ਬਾਤ ਤਨ ਕੈਫ ਚੜਾ ਬਹਿ ਮਿਲ ਮਿਲ ਗੀਤ ਮਦਰ ਧੁਨ ਗਾਵਹਿ ਵਿਵਦ ਵਿਦਨ ਤਨ ਕਰਤ ਬਿਲਾਸ ਆਹ ਨਾਇਕ ਨਾ ਕਰੈ ਨਿਰਪਤੀ ਕੋ ਤਰਾਸਾ ਛੈ ਛੈਲ ਨਾ ਛੋੜਾ ਜਾਈ ਨਿਸ ਦਿਨ ਰਾਖਤ ਕੰਠ ਲਗਾਈ ਜਬ ਕਭੂ ਸਿਧਾਵੈ ਏਕ ਅੰਬਾਰੀ ਤਾਹ ਚੜਾਵੈ ਤਹੇ ਕਾਮ ਖੀੜਾ ਕਾ ਕਰੈ ਬਾਤ ਪ੍ਰਤਾਤੇ ਨਾਇਕ ਨਾ ਡਰੈ ਦਿਨ ਰਾਜਾ ਚੜਾ ਸ਼ਿਕਾਰ ਆਹ ਸੰਗ ਲੈ ਮਹਿਰੀਆ અપਾਰਾ بیگم سو شکار سدہائی ایکم باری تہے چڑھائی ایک سخی تہے چڑھت نیہارا جائے بھو سو پھے دو چارا سنن لب بات چت مو راખી اور نار سو پرگٹنا پاخی دوہ تا کو جب گج نکٹایو تب تا کو ਇਸੀ ਬੰਰ ਮਾਰ ਚੁਕਾ ਹੈ ਨਾਰ ਕਹੀ ਪੀਏ ਜਨ ਜੀਏ ਡਰੋ ਕਹੋ ਤਿਰਤਰ ਤੁਮੈ ਸੋ ਕਰੋ ਕਰੀ ਰੂਖ ਕੇ ਤਰੈ ਨਿਕਾਰਾ ਅਨਲਪਟ ਰਹਾ ਤਾ ਸੋ ਤਾ ਯਾਰਾ ਆਪ ਪਿਤਾ ਪ੍ਰਤ ਕੀਆ ਭਿਆਨਾ ਮਾਰੇ ਰੀਛ ਰੋਜ ਮ੍ਰਿਗ ਨਾਨਾ ਤਾਹੇ ਰਹਾ ਝੂਠ ਲਖਾ ਤ੍ਰਿਏ ਉਸੀ ਸਹੀ ਕੋ ਵਰਡ ਪ੍ਰਹਾਰਾ ਝੂਠ ਬਚਨ ਇਹਨ ਮੁਝੈ ਉਚਾਰਾ ਖੇਰ ਆ ਖੇਡ ਭੂਪ ਗ੍ਰਹਿ ਆਇਓ ਤਿਸੇ ਬਿਰਸ਼ ਤਰ ਕਰੀ ਗਜਪਰ ਪੀਏ ਲਇਓ ਚੜਾਏ ਕੈ ਅੰਬਾਰੀ ਬੀਜ ਕਰੇ ਸੁਪਾਏ ਲਵਟ ਲਵਟ ਦੋ ਖੇਡ ਕਰਤ ਮੁਸਕਾਏ ਘਾਰੇ ਹੋ ਹਮਰੋ ਭੂਪਤ ਪੇਦ ਨਾ ਸਕਿਓ ਪਾਏ ਘਾਰੇ ਇੰਦ ਪਹਿਲੇ ਰੂਖ ਚੜਾਏ ਤੈ ਲੈ ਆਈ ਫਿਰ ਧਾਮ ਉਲਟਾ ਤੇ ਝੂਠਾ ਕੀਆ ਭੇਰ ਦੀ ਜੇ ਬਾਮ ਇਤ ਸ੍ਰੀ ਚరిత్ర ਪਖਿਆਨੇ ਰਿਆ ਚరిత్రੇ ਭੂਪ ਮੰਤਰੀ ਸੰਵਾਦੇ 374 ਚరిత్ర ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਇਸ਼ਕ ਤੰਬੂਲ ਸ਼ਹਿਰ ਹੈ ਜਹਾਂ ਇਸ਼ਕ ਤੰਬੂਲ ਨਰਾਜਿ ਤਹਾਂ ਸ੍ਰੀ ਸ਼ਿੰਗਾਰ ਮਤੀ ਤਿਹਦਾਰਾ ਜਾਸੀ ਨਾ ਬ੍ਰਹਮ ਸੁਨਾਰਾ ਅੜਿਲ ਸ੍ਰੀ ਜਗ ਜੋਵਨ ਦੇ ਤਿਹ ਸੁਤਾ ਬਖਾਨੀਐ ਦੁਤੀਆ ਰੂਪ ਕੀ ਰਾਸ ਜਗਤ ਮਹਿ ਜਾਣੀਐ ਅਧਿਕ ਪ੍ਰਵਾਹ ਜਲ ਥਲ ਮਹਿ ਜਾ ਕੀ ਜਾਣਿਤ ਹੋ ਨਰੀ ਨਾਗਨੀ ਨਾਰ ਨ ਵੈਸੀ ਮਾਨੀਯਤ ਦੋਹਰਾ ਤਾਹ ਇੱਕ ਪੂਤ ਸਰਾਫ ਕੋ ਤਾ ਕੋ ਰੂਪ ਅਪਾਰ ਜੋਰ ਨਹਿ ਨਾਰੀ ਰਹੇ ਜਾਣ ਨਾ ਗ੍ਰਹਿ ਬਿ ਸੰਭਾਰ ਚਉਪਈ ਰਾਜ ਸੁਤਾ ਤਾ ਕੀ ਛਬ ਲਹੀ ਮਨ ਬਜ ਕ੍ਰਮ ਮਨ ਮੈਂ ਅਸ ਕਹੀ ਏਕ ਮਾਰਗ ਹੈ ਯਾਹੇ ਮੰਗਾਉਂ ਕਾਂ ਭੋਗ ਰੁਚਿ ਮਾਨ ਮਚਾਉਂ ਪਠੈ ਸੈਤਰੀ ਦਈ ਤਹਾ ਇਕ ਤਾਹੇ ਬਾਤ ਸਮਝਾਏ ਅਨ ਕਿਨਿਕ ਅਮਿਤ ਦਰਬਦੈ ਤਾਹੇ ਭੁਲਾਈ ਜਿਹ ਤੇ ਭਾਂਤ ਕੁਾਰ ਭਾਂਤ ਭਾਂਤ ਕੇ ਕਰਤ ਵਿਲਾ ਸਾਹ ਮਾਨਤ ਕਿਸੀ ਨਾ ਨਰ ਕੋ ਉਤਰਾ ਸਾ ਲਗੇ ਆਏ ਪਤਾ ਤਹ ਗਇਓ ਅਦਿਕ ਬਿਮਨ ਤਾਕੋ ਮਨ ਭਇਓ ਅਵਰ ਘਾਤ ਤਬ ਹਾਥ ਨਾ ਆਏ ਇਕ ਬਾਤ ਤਬ ਤਾਹੇ ਬਨਾਈ ਬੀਚ ਸਮਿਆਨਾ ਕੇ ਤਿਹਸੀਆ ਐ ਜਿਦ ਨਾਵ ਠਾੜ ਉਪਰ ਅਵਰ ਸਮਿਆਨਾ ਡਾਰਾ ਵਾਕੋ ਜਾਏ ਨਾ ਅੰਗ ਨਿਹਾਰਾ ਆਗੇ ਜਾਏ ਪਿਤਾ ਚਨਨੀ ਨਾਂ ਜੋਲ ਪ੍ਰਣਾਮ ਤੋ ਕਰਦੀ ਨਾ ਅੜਿਲ ਤਿਸ ਸਮਿਆਨਾ ਕੇ ਤਰਪਿਤ ਬੈਠਾਇਓ ਏਕ ਏਕ ਕਰਤਾ ਕੋ ਦਿਖਾਇਓ ੂਪ ਵਿਦਾ ਹਵੈ ਜਵੈ ਆਪਣੇ ਗ੍ਰਹਿ ਆਇਓ ਹੋ ਕਾੜ ਤਹਾਂ ਤੇ ਮਿੱਤਰ ਸੇਜ ਉਪਰ ਲਿਓ ਦੋਰਾ ए सो राजा छला सका भेद न पाए दोहता के ग्रह जाय सिर आयो कोर मुंडाए इत श्री त्रित्रुप ख्याने त्रया चित्रे भूप मंत्री संभाते। तीन संभाते 375 चरितर समाप्त मस्त शुभमस्ते अपजू